ਸ਼ਲੋਕ ਮਹੱਲਾ ਪੰਜਵਾਂ ਕਾਮਨਾ ਕਰਹੀ ਆਪਣਾ ਫਿਰੇ ਅਵੰਤਾ ਲੋਏ ਨਾਨਕ ਨਾਏ ਵਿਚਾਰੀਐ ਸੁਖ ਕਨੇਹਾ ਹੋਈ ਆਪਣਾ ਕੰਮ ਨਹੀਂ ਕਰਦਾ ਜਿਹਨੂੰ ਬੱਚਾ ਜਾਂਦਾ ਸਕੂਲ ਜਾਂਦਾ ਉਹ ਆਪਣਾ ਕੰਮ ਕਰੇ ਦੁਨੀਆਂ ਦੀਆਂ ਕਹਾਵਾਂ ਪੜ੍ਹੀ ਜਾਂਦਾ ਜਾਂ ਕੋਈ ਹੋਰ ਇਲਤ ਕਰੀ ਜਾਂਦਾ ਇਹ ਜਿਹੜੇ ਜਲੀਲ ਗੱਦ ਦੁਨਿਆਵੀ ਕੰਮ ਨੇ ਆਪਣੇ ਸਾਹਬ ਦੀ ਆਪਣਾ ਕੰਮ ਉਹ ਹੈ ਕੀ ਦਾ ਸਾਨੂੰ ਫਾਇਦਾ ਹੋਣਾ ਹੈ ਦਰਗਾਹ ਜਿਹੜਾ ਨਾਲ ਜਾਣਾ ਅਵਰ ਕਾਜ ਤੇਰੇ ਕੇ ਵੇਰ ਨਾਮ ਸਾਜ ਸੰਗਤ ਭਜ ਕੇ ਵੇਰ ਨਾਮ ਆਪਣਾ ਕੰਮ ਠੀਕ ਹੈ ਜੀ ਅਵਰ ਕਾਜ ਇਹ ਦੀ ਜੋੜੇ ਸਰੀਰ ਦਾ ਕੰਮ ਹੋਰ ਤੇਰੇ ਦੀ ਹੁੰਦੀ ਤੇਰੇ ਅਵਸਾਰ ਕਮਲਿਆਂ ਫਰੀ ਜਾਣਾ ਲੋਕਾਂ ਨਾਲ ਗੱਲਾਂ ਰਲਿਆ ਆਇਆ ਕੀ ਇਹ ਨਾਨਕ ਨਾਏ ਵਿਚਾਰੀ ਹੈ ਸੁਖ ਕਿਨੇ ਆ ਹੋਈ। ਹਾਂ ਮੈਂ ਕਹਿੰਦਾ ਜੇ ਲੋਭ ਨੂੰ ਵਿਸਾਰਤਾ ਤਾਂ ਸੁਖ ਕਿਹੜੇ ਸਭੀ ਕੇ ਸੁਖ ਦੀ ਆਸ ਤੀ ਬੇਸਕੂਈ ਹੈ। ਨਹੀਂ ਫਰੀ ਹੋ। ਠੀਕ ਹੈ। ਇਸ ਸੰਸਾਰੀ ਕਮਾਚੋ ਸੁਖ ਨਹੀਂ ਹੈ ਕਹਿਣ ਦਾ ਮਤਲਬ ਇਹ ਸੰਸਾਰੀ ਕੰਮ ਅਸੀਂ ਕਰਦੇ ਆਂ ਸੁਖ ਵਾਸਤੇ ਕਰਦੇ ਆਂ ਇਹਨਾਂ ਨੂੰ ਸੁਖ ਨਹੀਂ ਮਿਲਦਾ। ਚੋਖਾ ਉੱਪਰ ਉੱਪਰ ਹੋ ਅੱਤ ਦੁਖੋ। ਠੀਕ ਹੈ ਜਿਹਨੂੰ ਕਹਿੰਦੇ ਆ ਕਬੀਰ ਜੀ ਸੁਖ ਮੰਗਤ ਦੁਖਾ ਕੇ ਆਗੇ ਆਵੇ ਹੈ ਜੀ ਹਾਂ ਜੀ ਆਈਆਂ ਉਹ ਮਿਲੂ ਠੀਕ ਹੈ ਜੀ ਮਹੱਲਾ ਪੰਜਵਾਂ ਵਿਖੇ ਕੁੜਤਣ ਸਗਲ ਮਾਹੀਂ ਜਗਤ ਰਹੀ ਲਪਟਾਈ ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਮ ਦੇ ਵਿੱਚ ਜਿਹੜੀ ਫੈਲੀ ਹੋਈ ਹੈ ਮਤਲਬ ਇਹ ਨਹੀਂ ਮਾਇਆ ਕੋੜੀ ਇਕ ਦੂਰੇ ਨਾਲ ਮੋਤੇ ਦੇ ਸਾਰ ਨੂੰ ਤੇ ਰਾਜਗੀ ਹੈ ਆਪ ਦਾ ਬਹਿਣਾ ਜੋ ਕੁੜਤਲ ਪੈ ਗਈ ਉਹਨਾਂ ਦੇ ਵਿੱਚ ਜਾਨੀ ਇੱਕ ਦਾ ਇਹ ਮਾਇਆ ਨੇ ਘਰ ਘਰ ਪ੍ਰੇਮ ਤੇ țeੜ ਪੈ ਜਾਂਦੀ ਹੈ ਸਾਰਿਆਂ ਤੇ ਮਾਹੀ ਸਾਰਿਆਂ ਦੇ ਵਿੱਚ ਹੁਣ ਤਾਂ ਪਿਓ ਪੁੱਤ ਬੰਦੀ ਜੱਡੇ ਕਿ ਕਿਸੇ ਨਾਲ ਪਿਆਰ ਨਾਲ ਤੇ ਕਿਸੇ ਨਾਲ ਕਿਸੇ ਗੱਲ ਤੇ ਤੇ ਇੱਕ ਦੂਏ ਨਾਲ ਮਨ ਮੁਟਾਵ ਹੋ ਜਾਂਦਾ ਮੱਤਬੇਦ ਹੋ ਜਗਤ ਰਹੀ ਫੇਰ ਵੀ ਸਾਰਾ ਮਾਇਆ ਨੂੰ ਲਪਟਿਆ ਹੋਇਆ ਮਾਇਆ ਦੇ ਨੁਕਸਾਨ ਕਰ ਦੇਣ ਦੇ ਮਾਇਆ ਨੇ ਐਡਾ ਬੜਾ ਨੁਕਸਾਨ ਪਾ ਤਕੜਤਰ ਪਾਤੀ ਕਿ ਜਿਆ ਪਿਆ ਤੇ ਬੀਜੂ ਦੀ ਜੜੂ ਤੇ ਆ। ਕਹਿਣਾ ਮਤਲਬ ਹੈ ਜਗਤ ਇਹਨੂੰ ਲਿਪਟਿਆ ਹੋਇਆ ਹੈ ਕਿ ਇਹ ਹੋਈ ਹੈ। ਜਗਤ ਜਨ ਲਿਪਟਿਆ ਆ ਜਲ ਜੀਵ ਠੀਕ ਹੈ ਜੀ। ਮਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਮ। ਕਹਿੰਦਾ ਜਾਨ ਜਿਹੜਾ ਪਰਮੇਸ਼ਰ ਦਾ ਹੈ। ਜਿਹੜੇ ਉਹਦੇ ਜਾਣਕਾਰ ਨੇ ਜਿਨ੍ਹਾਂ ਨੇ ਵਾਇਆ ਤੋਂ ਅੱਗੇ ਜਾਣ ਲਿਆ ਚੇਤਨ ਨੂੰ ਜਾਣ ਲਿਆ ਜਿਨ੍ਹਾਂ ਨੇ ਚੇਤਨ ਨੂੰ ਜਾਣ ਲਿਆ ਉਹਨਾਂ ਨੂੰ ਨਾਮ ਬਿਛਾਲੇ ਉਹ ਵਿਚਾਰ ਲਿਆ ਮਾਨਕ ਜਦ ਹੀ ਵਿਚਾਰੇ ਆਜ਼ਾਦੀ ਹੈ ਜਦ ਲੱਗੀ ਹੋਈ ਹੈ ਆਜ਼ਾਦੀ ਹਰ ਕੇ ਨੇ ਇਹ ਵਿਚਾਰਿਆ ਕਿ ਹਰ ਕਾਲ ਨੂੰ ਉਹ ਸਾਰਿਆਂ ਫੇਰ ਮਿਠਾਲ ਕੋ ਹੁਣ ਦਿੰਦਾ ਹੈ ਮਿਠਾਲ ਕੋ ਹੁਣ ਦਿੰਦਾ ਕੋੜ ਤੱਕ ਦੂਰ ਕਰ ਦਿੰਦਾ ਹੈ ਏਕਤਾ ਲੈ ਦਿੰਦਾ ਕਰੂਗਾ ਸਾਰਿਆਂ ਦੀ ਏਕਤਾ ਹੋ ਜਾਏ ਪੈ ਜਾਣੀ ਰਾਜੇ ਦਾ ਰਾਜ ਕਿਹਾ ਰਾਜੇ ਦੀ ਬਰਦੀ ਵੀ ਜਲਦੀ ਕਹਾਂ ਦਾ ਮਤਲਬ ਹੈ ਜਿੱਤੇ ਬਰਦੀ ਵੀ ਜਲਦੀ ਤੇ ਰਾਜ ਆਪਣਾ ਨਹੀਂ ਕਿਉਂਕਿ ਬਰਦੀ ਜਲਦੀ ਹੋ ਜਾਲਾ ਚੰਗਾ ਪੌੜੀ ਇਹ ਨਿਸ਼ਾਨੀ ਸਾਧ ਕੀ ਜਿਸ ਪੇਟ ਨਾ ਆਵੇ ਫਿਰ ਬਹੁੜ ਨਾ ਨਾ ਉਹ ਬਚਾਲ ਲਿਆ ਸਾਧ ਹੈ ਸਾਧ ਦੀ ਨਿਸ਼ਾਨੀ ਹੈ ਉਹਨੂੰ ਅੱਜ ਮਿਠਾ ਲੱਗਦਾ ਕੌੜੀ ਲੱਗਦੀ ਹੈ ਆਧੇ ਨਿਸ਼ਾਨੀ ਹੈ ਜਿੰਦਾ ਵੱਡਾ ਲੋਟ ਜਿਆਦਾ ਉਹ ਸਾਧ ਨੇ ਬਚਾਰੇ ਵਿਚਾ ਦਾ ਹਰਤਾ ਨਾ ਜੋਨੇ ਕੌੜਾ ਖਾਣਾ ਬੀਆ ਛੋਟੇ ਤੋਂ ਛੋਟਾ ਦਾਣਾ ਖਾਵੇ ਕੌੜੇ ਉਹ ਬਟਾ ਰੁਕ ਪਉਂਦਾ ਕੌੜੇ ਦਾ ਘਰ ਕੇ ਸਾਤਾ ਹੈ ਨਹੀਂ ਫਿਰ ਉਹ ਬਚਾਲੀ ਨਾਲ ਮੁਲਾਕਾਤ ਵਧੀਆ ਰਹੂਗੀ ਘਾਟੇ ਜਿੱਦੀ ਜਾਂਦੀ ਜਮ ਕਾਂਕਰ ਨਾ ਮਰੀ ਜੰਮਦਾ ਕੰਮ ਕਰ ਜਦ ਜਮਾ ਦੂਰ ਨਾ ਕਰ ਮਾਰਨਾ ਨਾ ਤੁਦੋ ਉਹ ਡੇਵੇ ਦੀ ਹਣਾ ਤੁਹਾਡੇ ਕਰ ਜਾਮੜਦਾ ਉਹਦੋਂ ਨਹੀਂ ਕੰਮ ਕਰ ਮਾਰਦਾ ਨਾ ਹੁ ਤੱਕ ਹੁੰਦਾ ਫਾਰਮੂਲਾ ਹੁੰਦਾ ਭਵ ਸਾਗਰ ਸੰਸਾਰ ਵਿਖ ਸੋ ਪਾਰ ਉਤਰੀਐ ਹਰ ਗੁਣ ਗੁੱਫੋ ਮਨ ਮਾਲ ਹਰ ਸਭ ਮਲ ਪਰ ਹਰੀ ਹੈ ਜਿਦਾ ਸਾਰੇ ਹੀ ਬਿਗਰੂਪ ਆ ਪਾਉ ਸਾਗਰ ਦਾ ਛੋੜਾ ਜੋ ਹੈ ਗੈਰ ਜੋ ਹੈ ਪਾਉ ਦਾਦਰ ਦਾ ਜਿਦਾ ਹੈ ਬਿਗਰੂਪ ਹੈ ਉਹ ਇਹ ਤਾਂ ਪੜੇ ਹੋਣਾ ਉਤਰ ਜੂਗਾ ਜਿਹੜਾ ਐਸੇ ਸਾਧ ਨੂੰ ਰੱਬ ਲੂਗਾ ਹਾਰ ਗੋਣ ਗੋਫੋ ਬਲੀ ਹਰ ਗੋਣ ਸਾਰੇ ਠੋਕ ਠੋਕ ਕੇ ਪੜ ਲਓ ਸਰਮ ਮਾਇਆ ਦੀ ਅਗਰ ਬਾਕੀਏ ਲੋਭ ਮਾਇਆ ਦੇ ਇਹਨਾਂ ਨੂੰ ਦੂਰ ਕਰ ਦੋ ਛੱਡ ਦੋ ਇਹਦਾ ਤਿਆਗ ਕਰ ਦੋ ਇਹਨਾਂ ਦਾ ਹਰਨ ਕਰ ਦੋ ਅਚ ਲਾਲਚ ਕਰੋ ਕੁੜੇ ਦਾ ਔਗਣ ਦਾ ਤਿਆਗ ਕਰੋ ਪੈਣ ਦਾ ਬੋਧ ਰਹਿੰਦੇ ਹੈ ਧੋ ਗੁਮਸੋਦੋ ਕੀ ਭਾਵ ਹੁੰਦਾ ਗੋਦੜਾ ਵਿੱਚ ਇਹਨਾਂ ਨੇ ਪੂਰੇ ਥੋਕ ਕੇ ਭਰ ਲੈਣੇ ਜਿਆਦਾ ਤੇ ਜਿਆਦਾ ਵੱਧ ਤੋਂ ਵੱਧ ਭਰ ਲੈਣੇ ਕਦੇ ਜੀ ਚੱਪ ਤੇ ਰਹਿਣਾ ਬਾਤਵਾਤ ਕੋਈ ਚੀਜ਼ ਆ ਜੇ ਖਾਲੀ ਨਾ ਰਹਿ ਜਾਏ ਹੀ ਮਾਲ ਭਰਨਾ ਤੇ ਸਭ ਮਲ ਪਰ ਹਰੀਏ ਇਹ ਜਿਹੜੀ ਮਨ ਚੰਦ ਹੈ ਇਹਨੂੰ ਤੇ ਜਿਹੜਾ ਲੋਭ ਕੱਢ ਲਿਓ ਅੱਛਾ ਕੱਢੋ ਕਿ ਜਦੋਂ ਮਾਲ ਭਰ ਲਿਆ ਮਾਲ ਹਰ ਭਰ ਲਿਆ ਆਪਣੇ ਆਪ ਹੀ ਦੂਰ ਹੋ ਜਾਏਗਾ ਨਿਕਲ ਜਾਏਗਾ ਐਦਾ ਨਹੀਂ ਦੋਤ ਅੱਛਾ ਜੀ ਸੰਨਲੇ ਬਾਣੀ ਦੇ ਵਿੱਚ ਟੂਟੀ ਖੋਲਦੀ ਹੈ ਨਾ ਚੰਦੇ ਪਾਣੀ ਦੀ ਕੋਈ ਖੇਤੀ ਸਾਫ ਨਹੀਂ ਹੁੰਦਾ ਸੰਨਲੇ ਬਾਣੀ ਪਹਿਲਾਂ ਹੀ ਸਾਰਾ ਢੋਲ ਕੇ ਧੋ ਕੇ ਸਾਫ ਕਰਕੇ ਫਿਰ ਦੂਆ ਮਤਲਬ ਪਹਿਲਾਂ ਵਿੱਚੋਂ ਇਹ ਕੱਢਣਾ ਪੈਣੀ ਹੈ ਵਿਖ ਉਸ ਤੋਂ ਬਾਅਦ ਹਾਂ ਫਿਰ ਪਹਿਣਗੇ ਠੀਕ ਹੈ ਜੀ ਆਨੰਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰਹਰੀਏ ਪ੍ਰੀਤਮ ਮਿਲਦਾ ਹੈ ਉਹ ਪ੍ਰੀਤਮ ਨੂੰ ਮਲੇ ਰਹਿੰਦੇ ਨੇ ਉਹ ਇੱਕ ਮਨ ਦੀ ਕਿਛਤ ਰਹਿੰਦੇ ਨੇ ਆਪਣੇ ਗੂੜ ਨਾਲ ਜੁੜੇ ਰਹਿੰਦੇ ਨੇ ਪ੍ਰੀਤਮ ਗੂੜ ਹੈ ਹੋਰ ਜਿਹੜਾ ਪ੍ਰੀਤਮ ਦਾ ਉਹ ਦਾਸ ਹੈਗਾ ਹਮੇ ਦਾ ਹੁਕਮ ਦਾ ਉਹ ਮੰਨਦਾ ਦਬਾਉਣਾ ਕਹਿੰਦਾ ਮੇਰਾ ਹੁਕਮ ਚੱਲੇ ਜਾਂ ਪ੍ਰੀਤਮ ਨੂੰ ਪ੍ਰੀਤਮ ਮੰਨ ਲੈਂਦਾ ਪ੍ਰੀਤਮ ਨੂੰ ਸਮਝਾਉਂਦਾ ਇਹਦਾ ਗੂੜੇ ਫੇਰ ਪ੍ਰੀਤਮ ਕਹਿੰਦਾ ਮੈਂ ਤਾਂ ਦਾਸ ਹਾਂ ਤੇਰੇ ਤੋਂ ਕੀ ਬੜੇ ਫਿਰ ਫੇਰ ਇਹਨੂੰ ਅਕਲ ਆਉਂਦੀ ਹੈ ਇਹ ਦਾਸ ਬਹੁਤ ਕਿ ਫਾਇਦਾ ਹੈ। ਵੈਰ ਤੇ ਮੈਨੂੰ ਇਹਦਾ ਫਾਇਦਾ ਦਾਸ। ਨਾ ਹੋ ਜੇ ਕੋਈ ਕੰਮ ਦੀ। ਸਾਰੇ ਕੰਮ ਫ੍ਰੀ ਕਰਦਾ ਹੈ ਪਰਮੇਸ਼ਰ ਆਪਣੇ। ਹਾਂ। ਹੰਤਾ ਕੇ ਕਾਜ ਨੁਖਵਾ। ਹਰ ਕੰਮ ਕਰਾਵਾਂ ਆਇਆ ਰਾਮ ਵੀ ਦੇਖ ਲੈ। ਉਹ ਅਸਲ ਦੇ ਵਿੱਚ ਉਹ ਤਾਂ ਨਹੀਂ ਗੱਲ ਕਹਾਣੀਆਂ ਹੀ ਬਣਾਈਆਂ ਹੋਈਆਂ ਨੇ। ਉਹ ਐਂ ਦਿਖਾਇਆ ਹੋਇਆ ਹੀ ਹੈ। ਉਹਨੇ ਯਾ ਇਹ ਕੰਮ ਆਪੇ ਹੋ ਗਿਆ ਕਿ ਨਹੀਂ ਹੋ ਗਿਆ ਆਪਣਾ। ਅਗਰ ਕਰਦਾ ਸੀ ਤੇ ਉਹ ਪਿੱਛੇ ਕੜਾ ਕਰਨ ਵਾਲਾ ਹਰਾ ਕਰਨ ਵਾਲਾ ਕਹਿੰਦਾ ਹਰਾ ਕਰ ਦੂਗਾ ਆਪਾਂ ਨੂੰ ਫਿਰ ਲੱਗੂਗਾ ਹੈ ਹਰੇ ਨੂੰ ਫੜ ਲੱਗਦਾ ਫਿਰ ਠੀਕ ਹੈ ਜੀ ਕਿਤੇ ਤਾਂ ਪੱਤੇ ਵੀ ਹੈ ਨਹੀਂ ਨਾਲੇ ਨਾਰੋ ਆਹ ਨਾਲ ਮੂੜ ਦੇ ਪੱਤੇ ਜੀ ਉੱਤੇ ਹਰਾ ਦੀ ਉੱਤੇ ਬਹੁਤਾ ਠੀਕ ਹੈ ਮਨ ਦਾ ਆਪਣਾ ਹੀ ਖਰਾਬ ਹੈ ਇਹ ਕਹਿਣ ਨੂੰ ਕੋਈ ਦੂਜਾ ਹੈ ਪ੍ਰੇਮ ਵੀ ਕੱਢਿਆ ਹੋਇਆ ਹੈ ਉੱਤੇ ਨਹੀਂ ਕਹਿ ਸਕਦੇ ਪ੍ਰੇਮ ਨੂੰ ਕੁਝ ਅੱਛਾ ਜੀ ਬਾਹਰੂ ਦੀ ਨਾ ਕਹਿ ਹੋਵੇ ਉਹਦੀ ਗੱਲ ਤਾਂ ਸੁਣ ਵੀ ਉਹ ਹੋ ਜਾਂਦੀ ਹੁੰਦੀ ਹੈ ਦੋ ਆਂਧਵੀਂ ਉਹਦੀ ਵਰਗੋਈ ਕਰਦੇ ਹੁਣ ਤਾਂ ਕੀ ਗੱਲ ਦੀ ਜੀ ਮੂਲ ਹੈਗਾ ਫਿਰ ਉਹਨੂੰ ਪਾਰਬ੍ਰਮ ਮਿਲ ਜਾਂਦਾ ਆ ਕੇ ਹਾਂ ਜੀ ਨੇ ਹਰਿਆ ਦਾ ਲਾਂਦ ਤੇਰ be like